ਸ਼ਲੋਕ ਮਹਲਾ 5ਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਹਾਰ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ हे ਕਾਮ ਕ੍ਰੋਧ ਮਦ ਲੋਭ ਦੁਸ਼ਟ ਬਾਸ ਲੋ ਜਿਹੜੀ ਮੇਰੇ ਅੰਦਰ ਹੈ ਇਹਨੂੰ ਦੂਰ ਕਰ ਇਦਵਾਰ ਖੋਜੀ ਰਾਖ ਲੈਓ ਪ੍ਰਭ ਆਪਣੇ ਨਾਨਕ ਸਤ ਬਲਿਹਾਰ ਐਤਾ ਹੋ ਗਿਆ ਤੇਰਾ ਰਾਖ ਲੈਓ ਪ੍ਰਭ ਆਪਣੇ ਆਪਣੇ ਨੂੰ ਤਾਂ ਰੱਖ ਲੈਣਾ ਜਿਹੜੇ ਤੇਰੇ ਦੀ ਰਾਖੀ ਕਰ ਚਾਹੇ ਕਰ ਸਾਡਾ ਕੋਈ ਠੇਕਾ ਜਿਹੜੇ ਤੇਰੇ ਬਣ ਗਏ ਤੇਰੀ ਫੌਜ ਭਰਤੀ ਹੋ ਗਏ ਉਹਨਾਂ ਦੀ ਜਿੰਮੇਵਾਰੀ ਤਾਂ ਰੱਖ ਦੀ ਤੇਰੀ ਆੜ ਕੇ ਸਤ ਬਲਿਹਾਰ ਜਹਾਂ ਲੱਗਦਾ ਸਤ ਹੈ ਹੀ ਗਏ ਕੋ ਜੀ ਮਾਲਾ ਪੰਜਵਾਂ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾ ਦਾ ਜੀਵਿਆ ਜਿਨ ਸੱਚ ਨ ਲੱਗੋ ਰੰਗ ਖਾਂਦਿਆਂ ਖਾਂਦਿਆਂ ਮੂੰਹ ਘੱਟਾ ਪੈਨੰਦਿਆਂ ਸਭ ਆਬਦੋ ਹਾਂਜੀ ਚਲਾ ਗਿਆ ਫਡੀਆਂ ਵੀ ਬਸਲੀਆਂ ਪੈ ਜਾਂਦੀਆਂ ਨੇ ਚਮੜਾ ਵੀ ਗੜ ਜਾਂਦਾ ਬੰਦ ਵੀ ਕਹੇ ਚਾਹੁੰਦੇ ਆ ਜੀ ਕੋਈ ਦਰਦ ਵੀ ਕਹਾਂ ਜਾਂਦੇ ਸੀ ਦੰਤ ਮੁੱਖ ਰਸ ਨੇ ਸਭ ਆਕਾਸ ਜਾ ਬੋ ਤੇ ਠੀਕ ਹੈ ਜੀ ਸਾਰੇ ਕਹਾਂ ਜਾਂਦੇ ਹਾਂ ਜੀ ਪੈ ਨੰਦਿਆਂ ਸਭ ਅੰਗ ਪੈਲ ਦੇ ਤਲ ਦੇ ਸਾਰੇ ਅੰਗ ਸੁਟੜ ਕੇ ਫਤਲੇ ਪੈ ਗੇ ਢੜ ਘੜੀ ਸੋਟੀ ਲਕਤਾਂ ਦੀ ਸਭ ਸੁਬੜ ਗਈ ਹੱਡੀਆਂ ਹੀ ਰਹਿ ਗਈਆਂ ਇਹ ਗੱਟ ਗਈ ਵਜਨ ਘਟ ਗਿਆ ਨਾਨਕ ਤਰੇ ਗਿਤਨਾ ਦਾ ਜੀਵਿਆ ਜਿਨ ਸਤਿਨਾ ਲੱਗੋ ਰੰਗ ਕਹਨੇ ਸਭ ਕੁਝ ਘਟ ਗਿਆ ਚਲੋ ਸਰੀਰ ਤਾਂ ਗਿਆ ਕੋਈ ਗੱਲ ਨਹੀਂ ਦੁਨਿਆ ਤਾਂ ਸਭ ਦਾ ਹੀ ਘਟਿਆ ਇਹ ਭੁਗਤਾਂ ਵੀ ਘਟਿਆ ਦੁਨਿਆ ਦਾ ਵੀ ਘਟਿਆ ਸਾਰਿਆਂ ਦਾ ਇਹ ਤਾਂ ਲਾਗੂ ਹੋ ਭਗਤੀ ਸਾਰਿਆਂ ਤੇ ਹੀ ਉਹ ਦਾ ਜੀਵਿਆ ਇਹਨਾਂ ਸਾਥੀ ਨਾਲ ਲੱਗੋ ਲੱਗੋ ਇਸ ਦੌਰਾਨ ਜਿਹਨੂੰ ਸਾਥੀ ਦਾ ਲੱਗਦੀ ਲੱਗਿਆ ਉਹਨਾਂ ਨੇ ਕਾਹਦੇ ਤੇ ਚਿੱਟਾ ਟਾ ਲਿਆ ਸਰੀਰ ਉਹਨਾਂ ਦੇ ਕੀ ਖਟਿਆ ਉਹਨਾਂ ਦਾ ਕੋਈ ਖਟਣ ਲਿਆ ਉਹਨਾਂ ਦਾ ਜੀਵਨ ਤੇ ਰੱਖਿਆ ਇਹਨੂੰ ਸਾਥੀ ਦਾ ਆਂ ਵੀ ਜਿਹੜੇ ਉਹ ਆਟ ਕੱਢ ਲਿਆ ਕੱਢ ਲਿਆ ਤਾਂ ਕੇਸ ਤੋਂ ਉਹਨਾਂ ਦੇ ਬਣਾਇਆ ਜਿਹਨੂੰ ਸਾਥੀ ਦਾ ਲੱਗਦਾ ਠੀਕ ਹੈ ਜੀ ਕਿਨਾਂ ਕੇਸ ਬਣ ਕਿ ਉਹਨਾਂ ਨੇ ਸਰੀਰ ਦਾ ਤੇ ਲਾਇਆ ਏ ਕੰਨੂ ਵੀ ਤਾਂ ਕੁਝ ਲੈ ਕੇ ਚੱਲੇ ਦੀ ਹੈ ਕੁਝ ਜੀ ਪੌੜੀ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਬਣਾ ਜੇ ਜੇ ਰੱਖੇ ਆਪ ਤੈ ਜਾਏ ਖੜੋ ਬਣਾ ਜਿਵੇਂ ਜਿਵੇਂ ਤੇਰਾ ਹੁਕਮ ਉਹਨਾਂ ਦਾ ਹੋਈ ਹੈ ਹੁਦਾਂ ਦਾ ਹੋਈ ਹੈ ਜੋ ਹੁਕਮ ਤੇ ਜੇ ਜੇ ਰੱਖੇ ਆਪ ਤੈ ਜਾਏ ਖੜੋ ਜਿੱਤੇ ਨੂੰ ਰਗਰਨ ਆਪੋ ਤੇ ਖਲੋ ਜੱਲ ਅੱਲਾਹ ਬੋਲ ਚਾਕੇ ਇਹ ਨੂੰ ਐ ਸੇਬ ਦੂ ਨਾ ਪਰਮੇਸ਼ਰ ਦੀ ਗੱਲ ਨਹੀਂ ਹੈ ਇਹ ਅੱਛਾ ਜੀ ਤੇਰਾ ਖਜ਼ੂਰ ਹਰ ਆਪ ਅੱਦਰ ਬੂੜ ਉਹਦਾ ਖਜ਼ੂਰ ਹੈ ਉਹਦੇ ਉਹਦੇ ਜਿਉ ਤੇਰਾ ਹੋ ਗਈ ਉਹਨੂੰ ਉੱਥੇ ਚਲਾ ਗਿਆ ਠੀਕ ਹੈ ਲਾਏ ਉਧਰ ਲੱਗੇ ਰਹੇ ਕੋਈ ਉੱਧਾ ਰਿਆ ਖਰਜੀ ਨਾਮ ਤੇਰੇ ਕੇ ਰੰਗ ਦੁਰਮਤ ਧੋਵਣਾ ਜਪ ਜਪ ਤੁਧ ਨਿਰੰਕਾਰ ਭਰਮ ਪਉ ਖੋਵਣਾ ਜਿਹੜੇ ਤੇਰੇ ਨਾਲ ਜਿਹੜਾ ਤੇਰਾ ਗਿਆਨ ਉਹਦਾ ਜਿਹੜਾ ਰੱਬ ਸੀ ਉਹ ਆਪਣਾ ਨਾਮ ਤਾਂ ਦੀ ਕੋਸ਼ਿਸ਼ ਹੀ ਕੀਤੀ ਆਪਣਾ ਧਿਆਨ ਲਾਉਣ ਦੀ ਕੋਸ਼ਿਸ਼ ਹੀ ਕੀਤੀ ਕਿ ਆਪਾ ਆਦਮ ਨੇ ਲਾਇਆ ਲੈ ਤਾਂ ਦਰਗੁਤ ਤੀ ਜਾਣਦੀ ਠੀਕ ਹੈ ਪਾਸੇ ਕਿਉਂ ਜਾਣਦਾ ਹਾਂਜੀ ਜਪ ਜਪ ਤੁਧ ਨਿਰੰਕਾਰ ਭਰਮ ਭੋਖ ਹੋਵਣਾ ਜਪ ਜਪ ਤੁਧ ਬਿਕਾਰ ਜੇ ਤੁਧ ਬਿਕਾਰ ਨੂੰ ਜਪਦਾ ਪਰਮ ਤਮ ਇਹਦੇ ਵਿੱਚ ਖੋਇਆ ਜਾਂਦਾ ਪਰ ਭੋਗ ਦੀ ਜਿਹੜੀ ਖੋਖ ਹੈ ਨਿਕਲ ਜਾਂਦੀ ਪਰ ਭੋਗ ਆਤਮ ਭਰਮ ਦੇ ਨਾਲ ਜਾਂਦਾ ਗਵਾ ਜਾਂਦਾ ਸਰਬਲ ਅੰਤਰ ਬਾਹਰ ਇੱਕ ਮੈਨ ਅਲੋਬਣਾ ਜਿਹਨੂੰ ਤੇਰੇ ਨਾਲ ਜਿਹੜਾ ਕਰਦਾ ਦੀ ਜੀਵ ਉੱਦੀ ਮੂਲ ਦੀ ਗੱਲ ਚੱਲਦੀ ਹੈ ਅੱਛਾ ਤੇਰੇ ਰੰਗ ਰੱਤੇ ਕੌਣ ਹੈ ਫਿਰ ਇਹਦਾ ਹੀ ਅੱਛਾ ਜਿਹਨੂੰ ਆਤਮਾ ਨਾਲ ਚੜ ਕੇ ਉਹਨੂੰ ਦੁਬਾਰਾ ਜਨਮ ਕਾ ਇਹ ਜਿਆਨ ਦਾ ਦਾਰ ਦਾ ਗਿਆਨ ਇਹਦਾ ਗਿਆਨ ਹੋਰ ਕੀਤਾ ਗਿਆਨ ਇਹ ਕਿ ਅੰਦਰ ਬਾਹਰ ਇੱਕ ਨੈਨ ਲੋਭਣ ਜਦ ਅੰਦਰ ਵਾਲਾ ਬਾਹਰ ਵਾਲਾ ਇੱਕ ਹੋ ਜਾਂਦਾ ਹੈ ਫਿਰ ਦਰਸ਼ਨ ਹੁੰਦਾ ਪਤਾ ਲੱਗਦਾ ਮੈਨੂੰ ਇੱਕਾਂ ਫਿਰ ਇੱਕ ਦਾ ਪਤਾ ਲੱਗਦਾ ਬਾਹਰ ਵਾਲਾ ਅੰਦਰ ਵਾਲਾ ਇੱਕ ਹੋ ਕੇ ਰਹਿ ਜਾਂਦੇ ਇਹ ਕਾਲ ਮਨੇ ਕੋ ਕਹੇ ਰਹਿ ਜਾਂ ਮੇਰੀ ਹਮੇਸ਼ਾ ਵਾਸਤੇ ਤੇ ਨੇ ਅਲੋਪਾ ਬਲਤ ਲਈ ਅੱਖ ਖੁੱਲ ਜਾਂਦੀ ਹੈ ਜਾਂਦੇ ਫਿਰ ਪਤਾ ਲੱਗ ਜਾਂਦਾ ਇੱਕ ਆਪਣੇ ਪਤਾ ਲੱਗਣਾ ਹੋਰ ਕੀ ਪਤਾ ਲੱਗਣਾ ਜਿੰਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਬਣਾ ਜਿੰਦੀ ਪਛਾਤਾ ਹੁਕਮ ਤੈਨ ਕਦੇ ਨਾ ਰੋਬਣਾ ਇਹ ਹੁਕਮ ਨੂੰ ਪਛਾਣ ਲੈ ਕਦੇ ਨਹੀਂ ਰੋਦਾਂ ਉਹ ਲੋਕ ਕਹਿੰਦੇ ਯਾਨੀ ਇਹ ਪਛਾਣਨੇ ਕੀਤਾ ਹੀ ਸਭ ਹੁੰਦਾ ਔਰ ਰੱਬ ਨੇ ਕੀਤਾ ਉਹਨਾਂ ਕਰਤਾ ਦਾ ਸਭ ਕੁਝ ਚਾੜ ਤੋਂ ਹੋਏ ਨਾ ਕੋਈ ਬੁਰਾ ਇਹ ਜੇ ਆਪਾਂ ਜੋ ਸ਼ੁਰੂ ਚ ਆਇਆ ਸੀ ਜਿਉਂ ਜਿਉਂ ਤੇਰਾ ਹੁਕਮ ਤੇਰਾ ਹੁਕਮ ਔਰ ਆ ਹੁਕਮ ਅਲੱਗ ਲੱਗੇ ਇਹਦੇ ਤੋਂ ਪਰਕਾਰ ਤੇ ਹੁਕਮ ਨੇ ਦਫਾ ਹੁੰਦੇ ਤੇ ਅੱਛਾ ਜੀ ਆਇਆ ਹੁਕਮ ਸੀ ਤੇਰਾ ਉਧਰ ਗੜ ਗਿਆ ਜੁਨੇ ਪਾਸੇ ਹੋ ਗਿਆ ਧੂਆ ਹੋ ਗਿਆ ਧੂਆ ਪਾ ਗਿਆ ਕਰਨ ਗਿਆ ਹੋ ਗਿਆ ਇਹ ਆ ਕੇ ਫਰਕ ਪੈਂਦਾ ਹੁਕਮ ਤੇ ਆ ਦਾ ਕੀ ਜ਼ਰੂਰ ਹੈ ਹੁਕਮ ਹੁਕਮ ਪਛਾਣ ਲਿਆ ਉਹ ਕੰਪਿਛਾਨਿਆ ਕੀ ਹੈ ਕਿ 베ੜਾ ਹੁਕਮ ਨੇ ਜਿਹੜਾ ਨਾ 베ਰੀ ਵਰਚੀ ਹੈ ਉਹ 베ਰੀ ਬਹੁਤ ਹੈ ਇਹ ਪਛਾਣ ਲੋ 베ੜਾ ਹੁਕਮ ਨੇ 베ਰੀ ਬਹੁਤ ਹੈ 베ੜਾ ਹੁਕਮਾਂ ਮੇਰਾ ਨੁਕਸਨ ਕਰਦਾ ਇਸ ਕਰਕੇ ਆਪਣਾ ਲੋਕਾਂ ਦੇ ਵੱਧ ਆਪਣਾ ਲੋਕਾਂ ਨੂੰ ਨੁਕਸਾਨ ਇਹ ਕਰਦਾ ਠੀਕ ਹੈ ਜੀ ਜਿਹਦੀ ਪਛਾਣ ਹੈ ਜਿਹਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ ਆਪਣਾ ਉਹਦਾ ਅਲਸਾ ਜਾਦਾ ਨੁਕਸਾਨ ਜਾਂਦਾ ਹੁੰਦਾ ਜਦ ਐਸ ਤਰ੍ਹਾਂ ਆ ਗਈ ਵੀ ਜਿੱਦਾਂ ਮੇਰੀ ਵਰਜੀ ਦੀ ਗੱਲ ਮੈਂ ਆਪਣੀ ਵਰਜੀ ਣਾਉਣਾ ਉੱਥੇ ਖਸਾਲ ਹੁੰਦਾ ਫਿਰ ਉੱਥੇ ਰੋਣਾ ਪੈਂਦਾ ਜਿਹਨੇ ਇਹ ਨਾਲ ਪਛਾਣ ਲਈ ਉਹ ਉਹ ਦੂਰੀ ਤੇ ਛੱਡ ਦੁੱਦਾ ਠੀਕ ਉਹ ਵਾਲੀ ਦੋਰੀ ਛੱਡੇ ਜਾਂਦਾ ਮੈਂ ਆਪਣਾ ਮੋਢੀ ਹੱਥ ਮਾਰੇ ਆਪਣੇ ਪਾਸ ਵਾਲੀ ਦੋਰੀ ਛੜਨ ਦਾ ਗਾਣਾ ਦੋਏ ਪਾਸੇ ਦੋਰੀ ਤੂੰ ਹੜ ਫੜਦਾ ਹੀ ਸੀ ਉਹ ਛੱਡ ਦਿੰਦਾ ਉਹ ਠੀਕ ਹੈ ਜੀ ਨਾਉ ਨਾਨਕ ਬਖਸ਼ੀਸ਼ ਮਨ ਮਾਹੇ ਪਰੋਵਣ ਜੇ ਲਵ ਤਾਂ ਬਖਸ਼ੀਸ਼ ਜੇ ਤਾਂ ਬਖਸ਼ੀਸ਼ ਉਹ ਜਿਵੇਂ ਤੇ ਮਨ ਨੂੰ ਪਰੋਵਣਾ ਗੁਰਦਾਨੂ ਪਰੋਵਣਾ ਕਿਵੇਂ ਜਬ ਬਹੁਤ ਬੋਤੀ ਹੈ ਬੋਤੀ ਯਾਨੀ ਗਲੀ ਕਾਟਣ ਪਹਿਲਾਂ ਗਲੀ ਕੱਟੂ ਗਾਵ ਦੇ ਵਿੱਚ ਫਿਰ ਪਰੋਇਆ ਜਾਊਗਾ ਗੁਰਮਾਹੇ ਪਰੋਵਣ ਨਾ ਮੇਰੂ ਪਰੋ ਸਕਦਾ ਆਪਣੇ ਵਿੱਚ ਨਾ ਮੈਂ ਆਪਣੇ ਚ ਸਭੇੜ ਸਕਦਾ ਨੂੰ ਨਾਮ ਨੂੰ ਇੱਥੇ ਆਪਣੇ ਚ ਸਮਾ ਲੈਂਦਾ ਹਾਂ ਜੀ ਵਾਹ ਆਹ ਬੱਦੇ ਤੇ ਕਿਹ ਪਰੋਣ ਠੀਕ ਹੈ ਜੀ ਨਾਮ ਦੀ ਬਖਸ਼ਿਸ਼ ਮਨ ਵਿੱਚ ਪਰੋਈ ਰੱਖਣੀ ਹੈ ਜੀ ਉਹ ਹੀ ਠੀਕ ਹੈ